ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡਾ ਪਾਰਸ ਦਾ ਸੰਗੀਤ ਕਿੱਥੇ ਕਿੱਥੇ ਤੱਕ ਪਹੁੰਚ ਗਿਆ ਹੈ ਚੱਲ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਪਾਰਸ ਦੀ ਸੰਸਕ੍ਰਿਤੀ ਅਭਿਤਾ ਉਹ ਸਾਡੇ ਧਰਮ ਗ੍ਰੰਥਾਂ ਜਿਵੇਂ ਦਿਲਦੀ ਹੈ ਜਿਸ ਤਰ੍ਹਾਂ ਬਾਈਬਲ ਨੂੰ ਤਰਜਮਾ ਕਰਕੇ ਪੜੋ ਤੇ ਉਹਦਾ ਇਹਨਾਂ ਫਾਦ ਨਹੀਂ ਆਉਂਦਾ ਜਿੰਨਾ ਉਹਦੇ ਆਪਣੇ ਅੱਖਰਾਂ ਚ ਪੜਿਆ ਆਉਂਦਾ ਇਸੇ ਤਰ੍ਹਾਂ ਹੀ ਗੁਰਬਾਣੀ ਨੂੰ ਅਸਰ ਅਖਰਾਂ ਤੋਂ ਪੜਿਆ ਜਾਵੇ ਤੇ ਉਹਦਾ ਬੜਾ ਆਨੰਦ ਹੁੰਦਾ ਹੈ ਤੇ ਮੈਂ ਤੁਹਾਨੂੰ ਇਹ ਇਤ ਕਰਾਂਗਾ ਸੰਗੀਤ ਬਹੁਤ ਵਧੀਆ ਚੀਜ਼ ਹੈ ਅਸਰ ਉਹਨੇ ਖਾਰੀ ਬਾਣੀ ਬਹੁਤ ساری ਬਾਣੀ ਰਾਗਾਂ ਵਿੱਚ ਅਚਾਰਨ ਕੀਤੀ ਹੈ ਤੇ ਇਹ ਕੋਈ ਸਿਰੋਪੀ ਉਸ ਨੂੰ ਪੜਿਆ ਜਾਵੇ ਸਾਰੇ ਲੋਕਾਂ ਨੂੰ ਪੜਨ ਤੇ ਉਹਦੇ ਤੋਂ ਫਿਰ ਉਹਦਾ ਆਨੰਦ ਲੈਣ ਜਿਸ ਤਰ੍ਹਾਂ ਦਾ ਗੁਰੂ ਦੀ ਸ਼ਖ ਲਗਈ ਹੈ ਜਿਸ ਤਰ੍ਹਾਂ ਸਿੱਖ ਨੂੰ ਕੀ ਕਰਨਾ ਚਾਹੀਦਾ ਤੇ ਇਹ ਸਾਰਾ ਕੁਝ ਉਹਦੇ ਤੋਂ ਬਹੁਤ ਕੁਝ ਪ੍ਰਾਪਤ ਹੁੰਦਾ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਇਸ ਦੇਸ਼ ਤੇ ਆ ਕੇ ਸਾਡੀ ਭਾਰਤੀ ਸੰਸਕ੍ਰਿਤੀ ਜਿਹੜੀ ਹੈ ਉਹ ਬੜਾ ਤੁਹਾਨੂੰ ਠੀਕ ਤਰ੍ਹਾਂ ਚਲਾ ਰਹੇ ਹੋ ਜਮਨਜੀ ਦਾ ਬਹੁਤ ਬਹੁਤ ਧੰਨਵਾਦ